ਸ਼ਲੋਕ ਸੰਤ ਉਧਰਣ ਦਇਆਲੰਗ ਆਸਰੰਗ ਗੋਪਾਲ ਕੀਤਨ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਇਹ ਉਹਦਾ ਹਰ ਸੰਤਾਂ ਨੂੰ ਹੁੰਦਾ ਹੁੰਦਾ ਕਿਵੇਂ ਇਹ ਕਦੋਂ ਬਾਹ ਫੜਦਾ ਹੈ ਉਹ ਤਾਂ ਫੜਨ ਨੂੰ ਕਹਿਤਾ ਪਰ ਕਿਵੇਂ ਫੜਦਾ ਹੈ ਕੀ ਕਰਨਾ ਪੈਂਦਾ ਸੰਤਾਂ ਨੂੰ ਸੰਤ ਉਹਦਾ ਹਰਣ ਇਹ ਠੀਕ ਹੈ ਉਹ ਦਇਆਲ ਜਿਹੜਾ ਹੈਗਾ ਉਹੀ ਸੰਤਾਂ ਦਾ ਉਹਦਾ ਅਸਰ ਕਰਦਾ ਪਰ ਆਸਰੰ ਆਸਰਾ ਕਾਦ ਲਾਣਾ ਪੈਂਦਾ Gopal ਕੀਰਤਨ ਉਹਦੀ ਕੀਰਤੀ ਦਾ ਅਸਰ ਲਾਣਾ ਪੈਂਦਾ ਗੁਰਬਾਣੀ ਜਸ ਹੈ ਉਹਦੇ ਆਸਰੇ ਤਾਂ ਜਦੇ ਜਾ ਕੇ ਬਾਹ ਫੜਦਾ ਉਹਦੀ ਕੀਰਤੀ ਕਰਨੀ ਕੀਰਤੀ ਕਰਨ ਸਰਣ ਮਨੋਂ ਜੋਨ ਪਾਪ ਦੇ ਇਹ ਕੀਰਤੀ ਕਰਨੀ ਹੈ ਜਸ ਜਿਹੜਾ ਜਿਹੜਾ ਹੈ ਗੁਰਬਾਣੀ ਇਹਨਾਂ ਵਿਚਾਰ ਕਰਨੀ ਵਿਚਾਰ ਕਰਕੇ ਬੋਲਣਾ ਦੱਸਣਾ ਸਮਝਣਾ ਸਭ ਉਹਨਾ ਇਹ ਹੀ ਕੀਰਤਨ ਹਾਂਜੀ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ ਸੰਤ ਸੰਗੇਣ ਸੰਤਾਂ ਦੀ ਸੰਗਤ ਕਰਕੇ ਮਨ ਕੁਰਮਲ ਕਰ ਲੈਣਾ ਆਪਣੇ ਮਨ ਨੂੰ ਨਿਰਮਲ ਕਰ ਲੈਣਾ ਨਿਰਮਲੰਗ ਸੰਤ ਸੰਗੇਣ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਆਪਣੇ ਮਨ ਨੂੰ ਨਿਰਮਲ ਕਰਨਾ ਓਡ ਨਾਲ ਅਨਕ ਪਰਮੇਸ਼ਰ ਹੈ ਹਾਂ ਓਡ ਦੀ ਵੀ ਓਡ ਪਰਮੇਸ਼ਰ ਦੀ ਫਿਰ ਤੱਕ ਜਾਣੀ ਪਰਮੇਸ਼ਰ ਦੀ ਓਡ ਚਲੇਗਾ ਦੇਖੋ ਸੰਤਾਂ ਦੀ ਓਡ ਚ ਨਹੀਂ ਜਾਣਾ ਓਡ ਦੀ ਹੈ ਸੰਤ ਵੀ ਪਰਮੇਸ਼ਰ ਦੀ ਓਡ ਨੇ ਜੇ ਕੋਈ ਨਾਨਕ ਵੀ ਪਰਮੇਸ਼ਰ ਦੀ ਓਡ ਨਾਨਕ ਕਹਿੰਦਾ ਫਾਕ ਤਾਂ ਇਹ ਵੀ ਕਹਿੰਦੇ ਵੀ ਸਾਡੀ ਓਡ ਲੋ ਓਡ ਪਰਮੇਸ਼ਰ ਦੀ ਜਿਹਦੀ ਓਡ ਅਸੀਂ ਲਈਏ ਉਸੇ ਦੀ ਲੋ ਕਿਵੇਂ ਹੋਵੇ ਮਨ ਅਸੀਂ ਆਸਾਂ ਮਨ ਕਿਵੇਂ ਨਰਭੂਤੀ ਤੇ ਕਿਵੇਂ ਤੁਸੀਂ ਕਰ ਸਕਦੇ ਹੋ ਇਹ ਦੱਸਦੇ ਹੀ ਨਹੀਂ ਇਹ ਜਿਹੜੇ ਮੰਦਜ਼ੇ ਕਰਦੇ ਨੇ ਉਹ ਉਸ ਨਹੀਂ ਲੈ ਸਕਦੇ ਆਪ ਹਾਂਜੀ ਜਿਹੜਾ ਕੀਰਤਨ ਸਭ ਦਾਇਆ ਹੈ ਕੀਰਤਨ ਆਪਾਂ ਬਾਜੇ ਨਾਲ ਜਾਂ ਤਮਲੇ ਨਾਲ ਦਾ ਨਾ ਕੀਰਤਨ ਹੈ ਜੀ ਉਹਨੂੰ ਤਾਂ ਕੀਰਤਨ ਕਹਿੰਦੇ ਹੀ ਨਹੀਂ ਉਹਨੂੰ ਤਾਂ ਸਭ ਕਹਿੰਦੇ ਨੇ ਅੱਛਾ ਜੀ ਜਿਹੜਾ ਅਰਦਾਸ ਕਰਦੇ ਨੇ ਰੋਜ਼ ਉੱਥੇ ਦਰਬਾਰ ਸਾਹਿਬ ਦੇ ਅੰਦਰ ਸਰ ਤਾਂ ਸਭ ਚੌਂਕੀ ਕਹਿੰਦੇ ਨੇ ਇਹ ਤਾਂ ਕੀਰਤਨ ਵੀਹ ਕੀਰਤਨ ਕੀਰਤਨ ਦਾ ਵਿਆਖਿਆ ਨੇ ਕਿਆ ਘਰ ਕੀਰਤਨ ਕੀ ਇਹ ਕਰਤੇ ਕਹੋਏ ਵਿਚਾਰੋ ਅੰਦਰ ਕੀਰਤਨ ਕੇਵਲ ਵਿਖਿਆਨ ਤੇਵਲ ਗੁਰਬਾਣੀ ਦੇ ਵਿਖਿਆਨ ਨੂੰ ਸਰਦ ਰੁੱਤ ਮੂਲ ਨਾ ਮਿਟਈ ਕਾਮ ਸ਼ੀਤਲ ਨਾਨਕਾ ਜਪੰਦੜੋ ਹਰ ਹਿਰਦਾ ਜੇ ਕਿਸੇ ਨੇ ਸ਼ਾਂਤ ਕਰਨਾ ਹੋਵੇ ਹਿਰਦੇ 'ਚ ਠੰਡ ਵਰਤੋਣੀ ਹੋਵੇ ਆਪਣੇ ਤ੍ਰਿਸ਼ਨਾ ਦੀ ਅੱਗ ਬੁਝਾਉਣੀ ਹੋਵੇ ਕਿਸੇ ਨੇ ਆਪਣੇ ਅੰਦਰੋਂ ਜੇ ਤਾਂ ਨਾ ਤਾਂ ਨਾਲ ਬੁਝਦੀ ਵੀ ਇਹ ਨਾਲ ਹੀ ਬੁਝਦੀ ਹੈ ਔਰ ਠੰਡਾ ਹੁੰਦਾ ਨਾ ਚੰਦ ਨਾਲ ਹੁੰਦਾ ਚੰਦ ਵੀ ਚਾਨਣੇ 'ਚ ਚੀਜ਼ ਵਿੱਚ ਕੋਰ ਐ ਚੰਦੇ ਚਾਨਣੇ 'ਚ ਵੀ ਹਿਰਦਾ ਹਾਂ ਬਾਹਰ ਸਾਡੇ ਸਰੀਰ ਨੂੰ ਲੱਗੂਗੀ ਜਾਇ ਸ਼ਾਂਤਰ ਹੋਊਗਾ ਮਨ ਨਹੀਂ ਸ਼ਾਂਤ ਹੋਦਾ ਮਨ ਵਿੱਚ ਜਾਂ ਬੇਰੀ ਨਾ ਸਰਦੀ ਤੋਂ ਹੈ ਨਾ ਸਰਦੀ ਵੀ ਰੁੱਤ ਵਿੱਚ ਉਹ ਇਲਾਜ ਪਰਵਤ ਸਕਦੀ ਮੂਲ ਆਮ ਬਿਲਕੁਲ ਵੀ ਜਿਹੜੀ ਆਦੇ ਨਹੀਂ ਚਲਦੀ ਨਾਮ ਦਾ ਜਪਨ ਲੋ ਸ਼ਾਂਤ ਤਾਂ ਹੋਊਗਾ ਆ ਜਪਣ ਨਾਲ ਗੁਰਬਾਣੀ ਦੀ ਜੋ ਸਿੱਖਿਆ ਇਹਨੂੰ ਸਮਝਣ ਨਾਲ ਅਰੇ ਨੂੰ ਮੰਨਣ ਨਾਲ ਜਪੰਧੜੋ ਹਾਜ਼ਰ ਇਹਦੇ ਜਿਉਂ ਆਉਣਿਆਂ ਬਲਵੇਂ ਸ਼ਾਂਤੀ ਆਉਣੀ ਹੋਈ ਹੈ। ਹਾਂਜੀ। ਇਹਨਾਂ ਦਾ ਪਾਪ ਕੀ ਜਿਹੜਾ ਚੰਦਨ ਹੈ, ਚੰਦ ਹੈ, ਆ ਸਾਦਰ ਠੰਡ ਦੇ ਸਕਦੇ ਆ ਪਰ ਅੰਦਰ ਜੋ ਜੋਤ ਹੈ ਉਹ ਗਿਆਨ ਨਾਲੇ ਆਤਮ ਗਿਆਨ ਨਾਲੇ ਸਾਡੇ ਹੋਉਂਦਾ। ਦਾ ਭਾਵ ਹੈਗਾ ਵੀ ਜਪਣਾ ਜਾਂ ਕੋਈ ਕੱਖਰ ਨੂੰ ਲੈ ਕੇ ਨਹੀਂ ਕਰਨਾ ਸ਼ਬਦ ਵਿਚਾਰ ਜਪੰਧੜੋ ਹੈ। ਬਿਲਕੁਲ ਸਮਝ ਨਹੀਂ ਜਪੰਦੜਾ ਜੇ ਸਮਝਿਆਈ ਤਾਂ ਉਹ ਕਰਦੇ ਹੀ ਨੇ ਵਾਕਿਆ ਕਿਸੇ ਨੂੰ ਛੱਡ ਪੈ ਨਾ ਦੇਈ ਚਲੋ ਜਿਹੜੇ ਜਪਦੇ ਨੇ ਆਪਣੇ ਤਰੀਕੇ ਨਾਲ ਕਿਸੇ ਸ਼ਾਂਤੀ ਆਈ ਵੀ ਹੈ ਨਾਲ ਜੋ ਗਿਆਨ ਹੈ ਤੇ ਐਸਾ ਗਿਆਨ ਜੋ ਲਿਖਿਆ ਹੋਇਆ ਐਸਾ ਗਿਆਨ ਜੋ ਮੇਰੇ ਹੋ ਚਾਕਰ ਸੱਚੇ ਕੇਰੇ ਗਿਆਨ ਕਿਵੇਂ ਜਪਣ ਗਿਆਨ ਗਿਆਨ ਯਾਰੀ ਗੱਲ ਕਰੀ ਜਾਉਂਗੇ ਗਿਆਨ ਤਾਂ ਸਮਝੋ ਨਾ ਬਿਸ਼ੇ ਜੀ ਉਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਖਾਣੇ 'ਚ ਪੈ ਜਵੇ ਆਪਣਾ ਕੀ ਹੁੰਦਾ ਪਰ ਨਹੀਂ ਅਸੀਂ ਖਾਣੇ 'ਚ ਪੈਣ ਦੀ ਗੱਲ ਜੇ ਪੌਣੀ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਮਨ ਅੱਜ ਤੱਕ ਜਿਹੜੇ ਸੰਸਾਰ 'ਚ ਕਿਸੇ ਦਾ ਉਦਾਰ ਹੋਇਆ ਨਾ ਚਰਨ ਕਮਲ ਦੀ ਔਰ ਤੇ ਬਨਾ ਹੋਇਆ ਹੀ ਨਹੀਂ ਗੁਰ ਤੇ ਚਰਨ ਜਿਹੜੇ ਨੇ ਚਰਨ ਕੀ ਨੇ ਗੁਰ ਕੇ ਹੁੰਦੇ ਗੁਰ ਕੇ ਆ ਉਹਦੇ ਚਰਨ ਹੁੰਦੇ ਨੇ ਗੁਰ ਮੈਂ ਗਿਆਨ ਪ੍ਰਾਪਤ ਵਿਚਾਰੇ ਗਿਆਨੀ ਸੋਏ ਗੁਰ ਬਾਹਵ ਚ ਨੇ ਗੁਰ ਬੇਅੰਤ ਨੇ ਉਹਦੇ ਜਿਹੜੇ ਗੁਣ ਨੇ ਬੇਅੰਤ ਉਹ ਉਹਦੇ ਚਰਨ ਨੇ ਚਰਨ ਪਾਠ ਨੂੰ ਕਹਿੰਦੇ ਨੇ ਇਸੇ ਨੂੰ ਕਹਿੰਦੇ ਨੇ ਇਹ ਗੁਣ ਨੂੰ ਸਮਝ ਸਮਝ ਕੇ ਗੁਣ ਗ੍ਰਹਿਣ ਕਰਕੇ ਹੀ ਇਹ ਕਿਸੇ ਦਾ ਉਦਾਰ ਹੋਇਆ ਬਲਣਾ ਉਦਾਰ ਨਹੀਂ ਹੁੰਦਾ ਜਿੱਨਾ ਸ਼ਕਤੀ ਸੁਣ ਕੇ ਗੋਬਿੰਦ ਦੀ ਜਿਹੜੀ ਕਲਾ ਹੈ ਉਹਦੇ ਜਿੰਨੀ ਪਾਵਰ ਹੈ ਉਹ ਸੁਣ ਕੇ ਸਮਝ ਕੇ ਫੇਰ ਮਨ ਮਰ ਕੋ ਹੁੰਦਾ ਜਦੋਂ ਯਕੀਨ ਹੋ ਜਾਂਦਾ ਵੀ ਮੈਨੂੰ ਬਚਾ ਸਕਦਾ ਹੈ ਬਚਾਏ ਉਗਾਈ ਫੇਰ ਦਰਪੋ ਹੋ ਜਾਂਦਾ ਫਿਰ ਉਹਦੀ ਸ਼ਾਨ ਚਲੇ ਜਾਂਦਾ ਕਿੰਗ ਸ਼ਰਣਾਤ ਤੇ ਆਈ ਹੈ ਮੂਲ ਸੰਚਿਆ ਨਾਮ ਧੰਨ ਸੰਤ ਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆਹ ਦੇਖੋ ਟੋਟ ਨਾ ਆਵੇ ਮੂਲ ਸੰਚਿਆ ਨਾਮ ਧੰਨ ਨਾਰਦਾਨ ਇਹ ਨਾਮ ਧਨ ਸੰਚੇ ਇਕੱਠਾ ਕਰਨਾ ਜਮਾ ਕਰਨਾ ਦੱਸੋ ਦੂਆ ਤੁਹਾਨੂੰ ਜਮਾ ਹੁੰਦਾ ਇਹਨਾਂ ਜਿਵੇਂ ਜਪਦੇ ਨੇ ਗਿਆਨ ਜਮਾ ਹੁੰਦਾ ਗਿਆਨ ਦਾ ਜਮਾ ਹੈ ਮੁਕੋਲ ਗਿਆਨ ਤੋਂ ਅਸਾਂ ਗੁਰਬਾਣੀ ਦਾ ਗਿਆਨ ਹੈ ਹਾਂਜੀ ਜੇ ਸਿੱਧਾ ਕੋਲ ਤਾਂ ਗੁਰਬਾਣੀ ਰੱਖੀ ਉਹ ਰੱਖ ਕੇ ਦਿਖਾਉਣ ਕੀ ਕਰਨਗੇ ਇਹ ਗੁਰਵਾਇ ਰੁਪਾਲ ਨਾਲੇ ਜੋ ਹੋਰ ਨੇ ਜਪਣ ਵਾਲੇ ਕੁਛ ਨਹੀਂ ਬੱਲੇ ਹੈ ਉਹਨਾਂ ਦੇ ਜੇ ਨਾਮ ਤਾਂ ਬੱਲੇ ਹੋਵੇ ਤਾਂ ਤੋੜਦੇ ਨਹੀਂ ਆਉਂਦੀ ਜਿੰਨਾ ਮਰਜੀ ਕਦਮ ਕਰੀ ਜਾਓ ਦਿਨ ਰਾਤ ਮੁਕਤਾ ਹੀ ਨਹੀਂ ਹੈ ਜਿੰਨਾ ਮਰਜੀ ਗਿਆਨ ਕਰਾਈ ਜਾਓ ਜਿੰਨਾ ਮਰਜੀ ਗਿਆਨ ਅਗਲਾ ਲਈ ਜਾਵੇ ਮੁਕਤਾ ਹੀ ਨਹੀਂ ਉਹਦੇ ਕੋਲ ਸਰੀ ਜਿੰਦਗੀ ਨਹੀਂ ਜਾਵੇ ਨੂੰ ਤੇ ਨਵੇਂ ਗਿਆਨ ਲਈ ਜਾਊਗਾ ਉਹਦੇ ਕੋਲੋਂ ਨਹੀਂ ਮੱਕਣ ਲੱਗਾ ਸੰਤ ਜਨਾਂ ਸਿੱਤ ਸੰਗ ਪਾਈਏ ਵੱਡੇ ਪੁੰਨ ਇਹ ਸੰਤ ਜਨਾਂ ਦੀ ਜਿਹੜੀ ਸੰਗਤ ਹੈ ਨਾ ਮਿਲਦਾ ਸੰਤ ਜਨਾਂ ਦੀ ਵੱਡੇ ਪੁੰਨ ਕਰਕੇ ਹੀ ਪ੍ਰਾਪਤ ਹੁੰਦੀ ਹੈ ਪੁੰਨ ਵੱਡਾ ਕੀ ਹੈ ਕੱਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਣ ਬਸ ਗੁਣ ਗੋਬਿੰਦ ਗਾਣੇ ਹੀ ਜੇ ਕੋਣੋ ਗੋਬਿੰਦ ਐਨ ਇਮਾਨਦਾਰੀ ਨਾਲ ਗਾਉਂਦਾ ਨਾ ਜੇ ਨਗਰ ਹੋ ਕੇ ਗਉਂਦਾ ਫਿਰ ਪੁਨ ਹੈ ਜੇ ਧਿਆਨ ਤੇ ਹੋਰ ਕੋ ਬਾੜੀ ਪੜਦਾ ਫਿਰ ਇਹ ਗੱਲ ਹੀ ਵਾਹੀ ਹਾਂਜੀ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਅੱਠੇ ਪੈਰ ਹਰ ਕਿਤੇ ਰੱਖੇ ਵਾਰਜਸ ਨਿਤ ਗੁਰਬਾਣੀ ਸੁਣ ਕੇ ਨਿਤ ਗੁਰਬਾਣੀ ਸੁਣੇ ਆਦਾਕ ਪੈਰ ਆਪਣੇ ਤੇ ਧਿਆਨ ਹੋ ਕੋਈ ਰੱਖੇ ਆਪਣੇ ਅੰਦਰ ਵੀ ਖੋਜ ਜਲਦੀ ਰਹੇ ਔਰ ਨਾਲ ਕਿ ਮੈਂ ਆਪਾ ਕੀਨੇ ਮੇਰੇ ਨਾਲ ਪਰਮਿਕਾਈ ਪਰਮ ਤਾਂ ਰਹਦਾ ਯਾਰ ਅੰਦਰ ਆਪਣਾ ਆਪ ਨੂੰ ਖੋਜਦਾ ਰਹੇ ਹਾਂਜੀ ਠੀਕ ਹੈ ਜੀ ਐਕਸਪਾਰਮੀ ਪੌੜੀ ਸਮਾਪਤੀ ਹੈ ਜੀ